श्लोक महला पहला वैद्य बुलाया वैद्यगी पकड़ टटोल ले बा ओला वैद्य ना जानई करक कलेजे माहि गाड बुलाया वैद्यगी वैद्य नु बुलाया इलाज करण वास्ते पुरीज उत्ते वैद्य बुलाया पकड़ टोले ले ਉਹ ਬਾਹਨ ਉਫੜ ਕੇ ਨਵਸ ਦੇ ਹੈ ਨਵਸ ਦੇ ਉਹ ਬਾਹਨ ਫੜ ਕੇ ਦੇਖਦੇ ਹੁੰਦੇ ਬੈਦ ਨਵਸ ਉਹ ਬਾਹਨ ਟੁੱਟ ਰਿਹਾ ਕੋੜਾ ਬੈਦਾਂ ਜਾਣੀ ਕਲ ਕਰ ਲੇ ਜੇ ਕੋੜੇ ਬੈਦਾਂ ਹੋਏ ਨਹੀਂ ਪਤਾ ਵੀ ਜਿਹੜੇ ਗੁਰਬਖੂਤ ਨੇ ਉਹਨਾਂ ਦਾ ਤਾਂ ਮਰਜ਼ ਜਿਹੜੀ ਹੁੰਦੀ ਹੈ ਹਿਰਦੇ ਚੁੱਪਦੀ ਹੈ ਹਿਰਦੇ ਚ ਸਰੀਰ ਵਾਲੇ ਚ ਨਹੀਂ ਹੁੰਦੀ ਅੰਦਰਲੇ ਸਰੀਰ ਨਾਲ ਸੰਬੰਧ ਹੈ ਇਹ ਬਿਮਾਰੀ ਦਾ ਜਿਹੜੀ ਬਿਮਾਰੀ ਹੈ ਨਾ ਵਿਯੋਗ ਦੀ ਵਿਯੋਗ ਦੀ ਵਿਯੋਗ ਦੀ ਬਿਮਾਰੀ ਦਾ ਹਿਰਦੈ ਨਸਬੁੱਧ ਹੈ ਗੁਰ ਨਸਬੁੱਧ ਹੈ ਸਰੀਰ ਨਾਲ ਸਮਤ ਨਹੀਂ ਹੈ ਇਹ ਕਿਹ ਫਿਰ ਇਹ ਵੈਦ ਕੌਣ ਹੈ ਜੀ ਇੱਥੇ ਕੋਈ ਬ੍ਰਹਮ ਗਿਆਨੀ ਹੈ ਕਿ ਕੋਈ ਵੈਸੇ ਜਿਹੜਾ ਆਮ ਬਾਹਰ ਡਾਕਟਰ ਵੈਸੇ ਡਾਕਟਰ ਹੈ ਉਹ ਦੇਖਦਾ ਵੀ ਇਹ ਬੱਚੇ ਨੂੰ ਪਤਾ ਨਹੀਂ ਕੀ ਹੋਵੇ ਇਹ ਨਾਮ ਤੇ ਉਹ ਤੋਂ ਅਲੱਗ ਰਹਿੰਦਾ ਇਹ ਬਰਾਗ ਇਹਨੂੰ ਹੋ ਗਿਆ ਕਿਉਂ ਹੋ ਗਿਆ ਠੀਕ ਹੈ ਜੀ ਇਹਦਾ ਜੀ ਨਹੀਂ ਲੱਗਦਾ ਦੁਨੀਆਂ ਜਿੱਦਾਂ ਦੀਆਂ ਜੀ ਜੀ ਨਹੀਂ ਲੱਗਦਾ ਇਕੱਲੇ ਬੈਠਾ ਰਹਿੰਦਾ ਫਰੇ ਪਰਸਤ ਕਰੋਮ ਹੋ ਗਿਆ ਕੋਈ ਗੁਰੂ ਨਾਨਕ ਸਾਹਿਬ ਦੀ ਸਾਖੀ ਨਾਲ ਉਹ ਚਲੋ ਇਹਨਾਂ ਜਾਣ ਲੋ ਕੋਈ ਠੀਕ ਹੈ ਜੀ ਇਹ ਕਿਸੇ ਵੀ ਗੁਰਮਖ ਨਾਲ ਘਟ ਸਕਦੀ ਸਾਰਿਆਂ ਨਾਲ ਇਦਾਂ ਹੀ ਘਟਦੀ ਹੈ ਠੀਕ ਹੈ ਜੀ ਮਹੱਲਾ ਦੂਜਾ ਵੈਦਾ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ ਐਸਾ دارو ਲੋੜ ਲਾਓ ਜਿੱਤ ਵੰਜੈ ਰੋਗਾ ਘਾਣ ਵੈਦਾ ਵੈਦ ਸਵੈਦ ਤੂੰ ਉਹ ਵੈਦਾ ਸ੍ਰੇਸ਼ਟ ਬੈਠੇ ਨੂੰ ਤੁਮ ਜਿਹੇ ਇਹ ਪਹਿਲਾ ਰੋਗ ਨੂੰ ਪਛਾਣਿਆ ਕਿਹੜੀ ਕੀ ਤਾਂ ਪੈਦਾ ਹੋਇਆ ਫਿਰ ਐਸਾ ਦਾਰੂ ਰੋੜ ਲੋ ਐਸਾ ਦਾਰੂ ਲਬਲਾ ਜੇ ਤਵਜਹ ਰੋਗਾਂ ਕਾ ਨੂੰ ਰੋਗਾ ਬਹੁਜਨ ਸਾਰੇ ਹੀ ਰੋਗ ਦੂਰ ਹੋ ਜਾਣਗੇ ਉਹ दारू ਕਹਿਣ ਦਾ ਮਤਲਬ ਹੈ ਜਿਹੜੇ ਰੋਗ ਨੇ ਵਕਾੜਾਂਦੇ ਉਹਨਾਂ ਦਾ ਇੱਕੋ ਹੀ दारू ਹੈ ਨਾਮ ਨਾਮ दारू ਲਬਲਾ ਜਿੱਤੇ ਬਹੁਤ ਸਾਰੇ ਰੋਗ ਨੇ ਸਾਰੇ ਠੀਕ ਹੋ ਜਾਣਗੇ ਲੋ ਬਨਾਰ ਜਿੱਤ ਦਾਰੂ ਰੋਗ ਉੱਠਿਐ ਤਨ ਸੁਖ ਵਸੈ ਆਇ ਰੋਗ ਗਵਾਇ ਆਪਣਾ ਤਾਂ ਨਾਨਕ ਵੈਜ ਸਦਾਈ ਇਸ दारू ਰੋਗ ਉੱਠਿਐ ਜਿਹੜੀ दारू ਦਿੱਤੀ ਸਾਰੇ ਰੋਗ ਉੱਠ ਕੇ ਚਲੇ ਜਾਣ ਸਰੀਰ ਨੂੰ ਛੱਡ ਜਾਣ ਤਨ ਸੁਖ ਵਸੇ ਆਏ ਸਰੀਰ ਵਿੱਚ ਸੁਖ ਆ ਕੇ ਹਿਰਦੇ ਵਿੱਚ ਸੁਖ ਵਾਜਿਵੇਂ ਆ ਕੇ ਹਿਰਦੇ ਘਰ ਵਿੱਚ ਸੁਖ ਵਾਜਿਵੇਂ ਆ ਕੇ ਰੋ ਰੋਗ ਗਵਾ ਹੈ ਆਪਣ ਤਨ ਅੰਦਰ ਕੇ ਬੈਠ ਜਾਏ ਕਹਿੰਦੇ ਪਹਿਲਾਂ ਆਪਣਾ ਰੋਗ ਵਾ ਕੇ ਆ ਜੇ ਤੇਰਾ ਰੋਗ ਦੀ ਨਾ ਗਵਾਹ ਬਖਿਆ ਤੇਰੇ ਅੰਦਰ ਲੋਭ ਹੈ ਤੇਰੇ ਅੰਦਰ ਵੋਹ ਹੈ ਤੇਰੇ ਅੰਦਰ ਕ੍ਰੋਧ ਹੈ ਤੇਰੇ ਅੰਦਰ ਬੜਾ ਬਣ ਕੇ ਛੇ ਗੁਰੂ ਸਦੋਂ ਦੀ ਇੱਛਾ ਹੈ ਬੜ ਤੇ ਗੁਰੂ ਹਨਾ ਪਾਪੜ ਗੁਰੂ ਹੈ ਜਗਤ ਤੇਰੇ ਅੰਦਰ ਬੜਾ ਬੜਾ ਬਣ ਇੱਛਾ ਹੈ ਉੱਚਾ ਬਣ ਦੀ ਇੱਛਾ ਹੈ ਤੇਰੇ ਵਸ ਦੀ ਗੱਲ ਨਹੀਂ ਹੈ ਤੂੰ ਦੂਜਿਆਂ ਦਾ ਰੋਗ ਠੀਕ ਕਰ ਸਕੇ ਤੂੰ ਤਾਂ ਆਪ ਰੋਗ ਹੈ ਠੀਕ ਹੈ ਜੀ ਕਿ ਪਹਿਲਾਂ ਨਾਮ ਦੀ ਦਵਾਈ ਆਪ ਲੈ ਫੇਰ ਇਹਨੂੰ ਅੱਗੇ ਜਾ ਕੇ ਵੰਡ ਜੀ ਆ ਲੈ ਕੇ ਦੇਖ ਦੂਰ ਹੋਏ ਵੀ ਨਾ ਐਵੇਂ ਵੰਡੀ ਤੇਰੇ ਆਪਣੇ ਸੰਤ ਸਾਰੇ ਇਸ ਇਕੱਠਾ ਕਰੀ ਜਾਂਦੇ ਅ ਨੇ ਸਭ ਰਗੜੇ ਗਏ ਤੇ ਆ ਜਾਂਦੇ ਨੇ ਹਾਂ ਜੀ ਤਾਂ ਦੁਆਨ ਦੀ ਸਮਾਪਤੀ ਤੋਂ ਪਹਿਲਾਂ ਹੀ ਆਪਣਾ ਝੋਲਾ ਚੱਕ ਲੈਣੇ ਜੀ ਆਪਣਾ ਮਾਇਆ ਦਾ ਇਹ ਕਬੀਰ ਸੰਤ ਇਸ ਅਵਸਥਾ ਦਾ ਪੈਦਾ ਹੋ ਜਾਂਦਾ ਗੁਰਮੁਖ ਗੁਰਮੁਖ ਕਰਕੇ ਜਿਵੇਂ ਭਗਤ ਪ੍ਰਗਟ ਹੋਏ ਨਾ ਕਰਗਟ ਹੋ ਜਾਂਦਾ ਇੱਕ ਵੀ ਪੈਦਾ ਜਦ ਹੋਇਆ ਭਗਤ ਪੁਰਖ ਪਾਉ ਪੁਰਖ ਉਹ ਰੋਟੀਆਂ ਜੋ ਉਹਨਾਂ ਦੇ ਹਿੱਲਤੇ ਖਾਂਦੇ ਨੇ ਪ੍ਰਚਾਰ ਕਰਕੇ ਬਰਨਪੁਰਖੀ ਦਾ ਕਿੱਚੇ ਰੋਟੀਆਂ ਨਾਲ ਵਧੀਆ ਬਣਦੀਆਂ ਸੀ ਠੀਕ ਹੈ ਜੀ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਇਹ ਦੇਵਤੇ ਨਿਬਰਮ ਬਿਸ਼ੂਬ ਹੈ ਇਸ ਦੇਵਤੇ ਗੁਣਵਾਚ ਕਰਾਉਂਦੇ ਇਹਨਾਂ ਦੇ ਗਿਆਨ ਹਾਸਲ ਕਰਦਾ ਹੈ ਗਿਆਨ ਵਰਨ ਦਾ ਤਾਂ ਬ੍ਰਹਮਾ ਕਿ ਪਾਲਣਾ ਕਰਦਾ ਹੈ ਤਾਂ ਰਾਜਾ ਮਤਲਬ ਸੰਹਾਰ ਕਰਦਾ ਹੈ ਸ਼ੁਭ ਛੇਵਸੰਦੇ ਦੇ ਜੀਵਨ ਨੂੰ ਮਾਰਦਾ ਹੈ ਵਿਦੇਸ਼ ਕਰਕੇ ਮਾਰਨ ਚਾਹੀਦਾ ਬ੍ਰਹਮਾ ਗਿਆਨ ਕਰਾਉਂਦਾ ਹੈ ਦੇ ਪਤਾ ਨਹੀਂ ਕਿ ਇਹਨਾਂ ਦੇ ਫਾਇਦਾ ਕੀ ਹੈ ਕਿ ਇਹਨਾਂ ਨੇ ਤਾਂ ਤਰੀਕੇ ਨਾਲ ਬੈਠ ਕੇ ਪਰ ਇਹ ਮਹੇਸ਼ ਲਿਖਿਆ ਇੱਥੇ ਸ਼ਿਵ ਜੀ ਨਹੀਂ ਲਿਖਿਆ। ਨੂੰ ਕਹਿੰਦੇ ਨੇ। ਜੀ। ਇਹ ਕਹਿੰਦੇ ਪਾਲਣਾ ਕਰਦਾ ਜੀ ਕਿ ਇਹ ਗਿਆਨ ਦਿੰਦਾ। ਬ੍ਰਹਮਾ ਠੀਕ ਹੈ ਤਾਂ ਵਿਸ਼ਨ। ਵਿਸ਼ਨ ਦਾ ਦਾ ਜਿਹੜਾ ਸਰੀਰ ਹੈ ਸੰਤਾਲ ਦੇ ਸਰੀਰ ਦੀ ਭੋਜਨ ਦਿੰਦਾ ਪਰ ਮਨੁੱਖ ਦੇ ਸਰੀਰ ਦਾ ਭੋਜਨ ਦਿੰਦਾ। আচ্ছা ਜੀ ਤਾਂ ਮਹੇਸ਼ ਮਹੇਸ਼ ਤਾਂ ਖਤਮ ਕਰਦਾ ਦੱਸਿਆ ਮਾਰਦਾ ਗਿਆ ਅੱਛਾ ਜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ 베ਦ ਪੂਜਾ ਲਾਇਆ ਆ ਬ੍ਰਹਮਾ ਨੂੰ 베ਦ ਗਿਆਨ ਦੇ ਤੇ ਕਿ ਤੂੰ ਗਿਆਨ ਪੂਜਾ ਉਹ ਪੂਜਾ ਉਧਰ ਲੱਗ ਗਿਆ ਪੂਜਾ ਪਾੜ ਕੇ ਲੱਗ ਗਿਆ ਠੀਕ ਹੈ ਜੀ 10 ਅਵਤਾਰੀ ਰਾਮ ਰਾਜਾ ਆਇਆ ਦੇਤਾ ਮਾਰੇ ਢਾਏ ਹੁਕਮੀ ਸਬਾਇਆ ਕਸਾ ਬਤਾਰੀ ਰਾਮ ਰਾਜ ਆਇਆ 10 ਅਵਤਾਰਾਂ ਚ ਇਹਨਾਂ ਦਾ ਰਾਮ ਰਾਜ ਆਇਆ ਕਹਿੰਦੇ ਨੇ ਰਾਜੇ ਨੇ 10 ਹਫਤਾ ਲੈ ਇਹਨੇ ਰਾਮ ਨੂੰ ਪਿਛੂ ਦੇ ਐਂਟਾ ਮਾਰੇ ਧਾਇ ਹੁਕਮ ਸੁਵਾਇਆ ਉਹ ਜਿਹੜੇ 24 ਅਵਤਾਰ ਕਹਿੰਦੇ ਨੇ ਨਾ ਇਹ ਉਹਦੇ ਅਵਤਾਰ ਮੰਨੇ ਨੇ ਇੱਥੇ ਹੁਣ 14 ਦੀ ਬੁੱਝੇ 10 ਅਵਤਾਰ ਦਸੂ ਪਾਛਾਲੇ ਬੁੱਲੇ ਨੇ ਉੱਥੇ ਦਸੇ ਜਿਆਦਾ ਹਾਈਲਾਈਟ ਕੀਤੇ ਨੇ ਬਾਕੀ 14 ਦੀ ਬੁੱਝੇ ਰਾਮ ਰਾਜਾ 10 ਅਵਤਾਰ ਆਇਆ ਉਹ ਰਾਮ ਸਰਦਾ ਗੁੱਡਾ ਅਵਤਾਰ ਦੀ ਬਣੀ ਹੋਇਆ ਉੱਥੇ ਟੈਂਟਾ ਮਾਰੇ ਤਾਂ ਹੈ ਹੁਕਮ ਸੁਆਇਆ ਟੈਂਟਾ ਨੂੰ ਤਾਂ ਆ ਕੇ ਮਾਰਿਆ ਤਾਂ ਜ਼ਰੂਰ ਹੈ ਪਰ ਇਹ ਹੁਕਮ ਨਾਲੇ ਮਰੇ ਨੇ ਇਹ ਦੀ ਗੱਲ ਦੱਸਦੇ ਨੇ ਵੀ ਟੈਂਟ ਮਾਰੇ ਵੀ ਨਾ ਉਹ ਵੀ ਹੁਕਮ ਨਾਲੇ ਮਾਰੇ ਨੇ ਅੱਛਾ ਜੀ ਇਹ ਅਨੰਤ ਅਵਤਾਰੀ ਰਾਮ ਰਾਜਾ ਆ ਦਸਵੇਂ ਦੁਆਰ ਚ ਰਾਮ ਬੋਲੇ ਦਸਵੇਂ ਦੁਆਰ ਚ ਰਾਮ ਰਾਜਾ ਅਵਤਾਰ ਲੈਂਦਾ ਫਿਰ ਉਹ ਜਦੋਂ ਹੁਕਮ ਸੁਣਦਾ ਹੈ ਸਾਰੇ ਓਗਣਾਂ ਨੂੰ ਮਾਰਦਾ ਸਦਾ ਬੋਲਦਾ ਅਵਤਾਰ ਲੈਤਾ ਪਦਾਰਥ ਮਿਲਦਾ ਰਾਮ ਰੂਪ। ਜਾ ਕੇ ਓਗਣ ਮਰਦੇ। ਤਾਂ ਕਿਤੇ ਬਿਮਾਰੀਆਂ ਦਾ ਖਾੜਾ ਛੁੱਟਦਾ। ਠੀਕ ਹੈ। ਇਹ ਵੈਦ ਆਦੀ ਉਹ ਗੱਲ ਚੱਲ ਰਹੀ ਹੈ ਕਿ ਕਿਹ ਹੈ ਜਾ ਵੈਦ ਹੈ ਜਿਹੜਾ ਗੁਰਮੁਖਤ ਦਾ ਵੈਦ ਕਿਹੜਾ ਹੈ ਜੀ? ਇਹ ਤਾਂ ਜੀਵਨ ਹੈ, ਬ੍ਰਹਮ ਵੀ ਰੂਪ ਹੈ, ਵੈਦ ਵੀ ਦੇਖੋ ਨਾ ਇਹ ਜਿਹੜੇ ਸਾਰੇ ਨੇ ਵੈਦੀ ਦੇ प्रधानक वेदी है जेला ज्ञान पढ़ के इधर आऊंगा बेटी ओ ब्रह्मा तो ही होता है इधर ब्रह्म ज्ञानी बनदा पढ़ के आऊंगा उपाय तो भाव की है पैदा करते हैं कि अंदरों ज्ञान देता है उपाय दा भाव की है जी ऊपर करता है वो तो मां-बाप तो, तो पैदाता नहीं। नहीं, नहीं नहीं ना है नहीं, नहीं माया दा ऊपर चला गया ਉਹਦੀ ਬੁੱਧੀ ਮਾਇਆ ਤੋਂ ਉਪਰ ਚਲੀ ਗਈ। ਅੱਛਾ ਜਦੋਂ ਇਹਨਾਂ 'ਚ ਦੇਵ ਰੂਪੀ ਗੁਣ ਆ ਗਏ ਫਿਰ ਇਹ ਮਾਇਆ ਤੋਂ ਉੱਪਰ ਚਲੇ ਗਈ ਹਾਂਜੀ। ਉਹ ਡੁੱਬਿਆ ਸੀ ਓਕਾਣੇ ਦੇ ਉੱਪਰ ਆ ਗਿਆ ਉੱਪਰ ਆਇਆ ਉੱਪਰ ਆ ਗਿਆ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਬ੍ਰਹਮਾ ਨੂੰ ਵੇਦ ਦਿੱਤੇ ਬ੍ਰਹਮੇ ਨੂੰ ਪੂਜਾ ਲਾਗੇ। ਠੀਕ ਹੈ ਪਰ ਬ੍ਰਹਮਾ ਮਨ ਹੋ ਗਿਆ ਨਾ। ਹਾਂ ਹਾਂ ਬੁਝੇ ਬ੍ਰਹਮ ਦੇਤਾ ਰਹੀ ਬ੍ਰਹਮਾ ਨੂੰ ਵੇਦ ਦਿੱਤੇ। ਉਹਦੇ ਬਾਅਦ ਬ੍ਰਹਮਣ ਨੂੰ ਤਾਂ ਬ੍ਰਹਮਣ ਤਾਂ ਠੀਕ ਪਰ ਤਿਆਰ ਕਰਦੇ ਉਹਦੇ ਬਾਅਦ ਇਹ ਬਨਿਓ ਦੇ ਉੱਤਰਾਧਿਕਾਰੀ ਬ੍ਰਾਹਮਣ ਬਣ ਗਏ ਤਾਂ ਆਈਆਂ ਨਾ ਕਈ ਕਵੀਰ ਜੋ ਬ੍ਰह्मਚਾਰੇ ਸੋ ਸਾਡੇ ਤਾਂ ਬ੍ਰਾਹਮਣ ਕਹਿੰਦੇ ਪ੍ਰਭ ਦੀ ਵਿਚਾਰ ਕਰੇ ਪਰ ਤੁਸੀਂ ਕਰਦੇ ਨਹੀਂ 10 ਅਵਤਾਰੀ RAM ਰਾਜਾ ਆਇਆ ਹੁਣ 10 ਦਸਮ ਪ੍ਰਗਟ ਹੋਇਆ ਜੀ ਦਸਮੇ ਦਵਾਰ ਪੈਦਾ ਹੋਣੇ RAM ਦੇ ਰਾਜਾ ਬਣ ਕੇ ਜਾਣਾ ਦੇਖੋ ਰਾਜਤਾ ਦਸਮ ਦਵਾਰ ਚ ਬਣਦਾ ਜਿਆ ਕਬਨਾਸੀ ਆਇਆ ਘਰ ਆਇਆ ਉਹ ਸੱਚਖੰਡ ਗਿਆ ਇੱਥੇ ਨਹੀਂ ਆਇਆ ਹੈਗਾ ਜਨਮ ਲਿਆ ਸੀ ਇੱਥੇ ਆਇਆ ਸੀ ਉਹ ਸੱਚਖੰਡ ਵਾਲੇ ਕਹਿੰਦੇ ਆ ਗਿਆ ਵਾਰ ਗੁਰੂ ਨਾਨਕ ਸਾਹਿਬ ਦਾ ਹੀ ਹੋਇਆ ਕਿ ਰੋਵੈ ਰਾਮ ਨਿਕਾਲਾ ਪਿਆ ਉੱਥੋਂ ਹੁਣ ਉਹ ਨਿਕਾਲਾ ਪਿਆ ਸੀ ਹੁਣੇ ਮੁੜ ਆਏ ਹਾਂ ਜੀ ਉੱਥੋਂ ਤਾਂ ਨਿਕਾਲਾ ਸੀ ਪਿਆ ਹੁਣ ਘਰ ਆਇਆ ਹੁਣ ਅੱਛਾ ਜੀ ਤੇ ਸਾਰੇ ਜਿਹੜੇ ਔਗਣਾਂ ਨੇ ਦਇਨਤਾ ਮਾਰੇ ਧਾਏ ਹੁਕਮ ਸੁਭਾਇਆ ਆਰੇ ਬਾਰੇ ਐਤ ਹੁਕਮ ਬੁਲਿਆ ਤਾਂ ਦੇਤ ਮਰੇ ਪਾਣੇ ਚਾਇਆ ਤਾਂ ਅਮਰੇ ਨਹੀਂ ਨਹੀਂ ਵਾਰੇ ਇਹ ਤਾਂ ਹੁਕਮ ਚੇ ਮਰ ਗਏ ਠੀਕ ਹੈ ਜੀ ਪਾਣ ਜਾ ਉਹ ਬੇ ਟਾਪੇ ਮਰ ਜਾਣੇ ਨੇ ਹਾਂ ਜੀ ਈਸ਼ ਮਹੇਸ਼ਰ ਸੇਵ ਤਿਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਇਸ ਮੀਸ ਮਹੇਸ਼ਰ ਜਿਹੜੇ ਇਹ ਛੋਟੇ ਬਾਹਰ ਰਹਿ ਗਏ ਜਿਹੜੇ ਉਹ ਸੇਵਾ ਜਿਹਾ ਕਰ ਰਹੇ ਆਰਤਨ ਪਾਇਆ ਜਿਹੜੇ ਸੇ ਅਵਤਾਰੀ ਨਹੀਂ ਹੋਏ ਅਵਤਾਰ ਨਹੀਂ ਧਾਰਿਆ ਜੀ ਇਸ ਵੀ ਵੇਛੇ ਰਹਿ ਕੇ ਜੀ ਬਾਤਾਂ ਚ ਰਹਿ ਕੇ ਭੰਦੇ ਭਤੀ ਕਰਦੇ ਰਹੇਗੇ ਸੇਵਾ ਕਰਦੇ ਰਹੇਗੇ ਸ਼ਬਦ ਵਿਚਾਰ ਕਰਦੇ ਰਹੇਗੇ ਅੰਤ ਨਾ ਪਾਇਆ ਉਹਨਾਂ ਉਹ ਮਾਇਆ ਦੇ ਵਿੱਚੇ ਰਹਿ ਗਏ ਮਾਇਆ ਤੋਂ ਪਰਲਕ ਨਾ ਰੱਦੀ ਮਿਲਿਆ ਉਹਨੂੰ ਸੱਚੀ ਕੀਮਤ ਪਾਏ ਤਖਤ ਰਚਾਇਆ ਜਿਹਨੇ ਸ੍ਰਿਸ਼ਟੀ ਦੇ ਵਿੱਚ ਜੋ ਸੱਚ ਹੈ ਦੀ ਕੀਮਤ ਪਾ ਲਈ ਉਹਨੇ ਤਖਤ ਰਚਾ ਲਿਆ ਆਪਣੇ ਟਿੱਕੇ ਹਿਰਦੇ ਚ ਰਹਿ ਗਏ ਭਾਈ ਮੋਹਸਬ ਕੂੜ ਕੋ ਕੂੜ ਚ ਬਾਜ਼ੀ ਹਕਲਵੇੜ ਦਾ ਜਾ ਉਡ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਜਾਊਗਾ ਲਿਬੜੂਗਾ ਤੋਤੇ ਵਾਂ ਨਾ ਫਿਰ ਕੱਢ ਨਹੀਂ ਆ ਸਕਦਾ ਇੱਕ ਵਾਰ ਧੋ ਕੇ ਸਾਰਾ ਕੂੜ ਫਿਰਦੇ ਚ ਬਹਿ ਗਿਆ ਬਾਹਰ ਨਿਕਲਦਾ ਹੀ ਨਹੀਂ ਠੀਕ ਹੈ ਜੀ ਦੁਨੀਆ ਧੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤੋ ਰੋਂ ਫਰਮਾਇਆ ਆ ਦੁਨੀਆ ਨੂੰ ਤੱਡੇ ਲਾਤਾ ਆਪ ਚੁਪਕੇ ਬਹਿ ਗਿਆ ਆਪ ਦੀਨਾ ਦੀ ਹਕਮ ਹਦਾਈਏ ਕਰਮ ਕਰਾਇਆ ਕਰਮ ਇੱਥੇ ਕਰਮ ਕੌਣ ਕਰਾਉਂਦਾ ਦੁਨੀਆ ਹੁਕਮ ਕਰਾਉਂਦਾ ਕੰਮ ਅੰਤਰਾਤਮਾ ਕਰਾਉਂਦੀ ਹੈ ਕਰਮ ਤੋ ਰੋਂ ਫਰਮਾਇਆ ਪਰ ਪ੍ਰਮਾਤਮਾ ਤੋ ਰਹੀਉਂਦਾ ਹੈ ਜੇ ਆ ਤੋ ਰੋਂ ਫਰਮਾਨ ਹੁੰਦਾ ਹੈ ਕਰਮ ਕੰਮ ਕਰਵਾਉਂਦਾ ਇੱਥੇ ਆਪਣੀ ਮਰਜ਼ੀ ਆਪ ਦਾ ਬੋਲ ਬਲੀ ਆਣਦਾ ਜੋ ਫਰਮਾਨ ਹੁੰਦਾ ਉਦੋਂ ਇੱਥੇ ਉਹੀ ਹੈ ਮਹਾਰਾਜੀ ਜੀ ਤੁਰੰਤ ਫਰਮਾਇਆ ਕਿ ਸਾਰੇ ਜੀ ਹੁਕਮ ਚ ਹੈ ਜੀ ਹੁਕਮ ਚ ਹੈ ਨਾ ਪਾਪ ਕੋ ਬੰਦੇ ਲੋ ਬੰਦੇ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ ਜੀ